ਮਾਰੂ ਮਾਰੂਵਾਰ ਮਹੱਲਾ ਪੰਜਵਾਂ ਦੱਕਣੇ ਮਹੱਲਾ ਪੰਜਵਾਂ ੴ ਸਤਿਗੁਰ ਪ੍ਰਸਾਦ ਤੂੰ ਚ ਸੱਜਣ ਮੈਂਡਿਆ ਦੇ ਸਿਸ ਉਤਾਰ ਮੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ ਸੱਜਣ ਮੇਰੇ ਨੈਣ ਬਹੁ ਤੇਰੇ ਦਰਸ਼ਨ ਤਰਸਦੇ ਰਹੇ ਕਦਰ ਪਸੀਦੀਦਾਰ ਖਾਤੇ ਰ ਹੋਵੇ ਜੇ ਤੁਮ ਤੇ ਘਟਾ ਨੂੰ ਆਪਣਾ ਸਰੇ ਉਤਾਰ ਕੇ ਦੇਸੋ ਮਾਨੇ ਮੈਂ ਕਿਹਾ ਪੂਰੇ ਦਾ ਪੂਰੇ ਤੇ ਰਹਿਵਾਲ ਕਰਨਾ ਅੱਛਾ ਦੇ ਹੀ ਸਿਸ ਉਤਾਰ ਜਿਸ ਬੋਲੇ ਦੱਲੀ ਅਖਰੀ ਗੱਲ ਐ ਬੁੱਢੀ ਕੋਟੜੀ ਦੇਖਣ ਦੀ ਹੱਤੀ ਐ ਨਾ ਅੱਖੀਂ ਸੂਤ ਕਰ ਦੇਖਣ ਪਰ ਤੇਰੀ ਆਪ ਤਾਂ ਰੂਪ ਉਹ ਫਿਰ ਆਦੀਂ ਆ ਫਿਰ ਸਭ ਫਿਰ ਕੀ ਹੈ ਸੁਭਾਅ ਵੱਲ ਦੋਦਾ ਇਹੋ ਬਹਜਾ ਹੈ ਪ੍ਰੇਮ ਬਹੁ ਤੇਰੇ ਨਾਲ ਵੀ ਆਂਦੇ ਦੇਨੂ ਛੱਡ ਕੇ ਜਿਹੜਾ ਦੂਜੇ ਕਿਸੇ ਨਾਲ ਵੀ ਮੇਲ ਆਇਆ ਸਭ ਕੂੜੇ ਨੇ ਸਭ ਝੂਠੇ ਡਰੂ ਦੇ ਬਾਕੀ ਮੈਂ ਪਰਖ ਲੈ ਲਾ ਲਾ ਕੇ ਸਾਰੇ ਦੇਖ ਲੇ ਝੂਠੇ ਦੇ ਵਾਹ ਦੇਖ ਦੂਜੇ ਦਿਨ ਸਾਰੇ ਕੁਣਾਵੇ ਦੇਖ ਲੈ ਕੱਪੜਾ ਧੋਗ ਰੱਖਣੇ ਤੇ ਖਾਣੇ ਖਾਣੇ ਦੇ ਇਹ ਤਾਂ ਡਰਾਉਣਾ ਲੱਗਿਆ ਉਹਨਾਂ ਕੱਪੜ ਭੋਗ ਡਰਾਵੜੇ ਕਿੱਥੇ ਰਪਰੀਨਾ ਦੇਖ ਦੇਖ ਜਿ ਨਜ਼ਰ ਪਰ ਵੀ ਦੇਖ ਲੈਣਾ ਉਹਨਾਂ ਜਿਹੜੇ ਕੱਪੜ ਭੋਗ ਤੋਂ ਮੇਰੇ ਪਾਸੇ ਹਬ ਰਸ ਛਾਰ ਮੇਰੇ ਅੰਦਰ ਝਲ ਉਠਿਆ ਮੇਰੇ ਅੰਦਰ ਤੇਰੀ ਇੱਛਾ ਉਠੀ ਉਹ ਗੋਠੀ ਦੀ ਉਹ ਪੱਸੀ ਤੌ ਦੀਦਾਰ ਮੇਰੇ ਅੰਦਰ ਤਿਆਸ ਪੈਦਾ ਹੋਈ ਤੇਰੇ ਦਿਦਾਰ ਦੀ ਤੇਰੇ ਦਿਦਾਰ ਦੀ ਖਿਚ ਪੈਦਾ ਹੋਈ ਤੌ ਦੀਦਾਰ ਠੀਕ ਹੈ ਜੀ ਚਾਲੂ ਦਾ ਕੀ ਭਾਵ ਹੈ ਵੀ ਮੇਰੇ ਅੰਦਰ ਝਲ ਪੈਦਾ ਹੈ ਉੱਠੀ ਚਾਲੂ ਕੰਤੜੇ ਪੈਦਾ ਹੋਈ ਜਿਵੇਂ ਝਲ ਪੈਦਾ ਤੇਰੇ ਨਾਲ ਫਾੜੀ ਦੇ ਵਿੱਚ ਲਹਿਰ ਚਾਪੇ पैदा ਗੁੰਗ ਤੇਰੇ ਜਨ ਦੇ ਦੇਖ ਰਹੀ ਚੰਨ ਪੱਤੀ ਪੈਦਾ ਹੋਈ ਅੱਛਾ ਜੀ ਕਾਜਲ ਹਾਰ ਤਮੋਲ ਰਸ रस, ਪਸੇ ਹਬ ਰਸ ਛਾਰ ਬਿਨ ਪਸੇ ਹਬ ਰਸ ਛਾਰ ਇਹ ਜਿਹੜੇ ਕਾਜਲ ਦੇ ਰਸ ਲੈ ਤਮੋਲ ਦੇ ਰਸ ਦੇ ਕੰਧ ਤੇ ਸਪਸ਼ਟੋ ਬਿਨ ਸਾਰੇ ਖੇਲ ਸਾਰੇ माया रूप ਨੇ ਹੈ اچھا ਕਾਜਲ ਦਾ ਪਾਵ ਹੈ ਵੀ ਕੋਈ ਕਾਲੀ ਚੀਜ਼ ਹੈ ਰੱਖ ਲੈਂਦੇ ਨੇ ਥਾਲੀਆਂ ਉਹ ਦੇਵਤਿਆਂ ਹੁੰਦੇ ਨੇ ਉਹ ਜਿਹੜਾ ਪਣ ਦੇ ਲਾ ਕੇ ਖਾਂਦੇ ਨੇ ਸਾਰੇ ਨੇ ਮਾਇਆ ਰੂਪ ਨੇ ਠੀਕ ਹੈ ਜੀ ਕੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ ਗੁਰਮਖੀ ਕੀਤੋ ठाਟ ਸਿਰਜ ਸੰਸਾਰੀ ਤੂੰ ਸੱਚਾ ਸਾਬ ਉਹ ਆਪੇ ਸੱਚ ਅਸੱਚੇ ਕਹਤਾਂ ਨੂੰ ਕੀਤਾ ਝੂਠ ਨਾਲ ਨਹੀਂ ਤਾਰੇ ਸਾਰ ਰੱਖਿਆ ਜਿਹੜਾ ਸੱਚਾ ਹੋ ਗਿਆ ਉਹ ਤਾਂ ਅਪਣਾ ਲਿਆ ਆਪਣੇ ਨਾਲ ਜੋੜ ਲਿਆ ਝੂਠ ਦੂਰ ਰੱਖਿਆ ਆਪ ਤੂੰ ਸੱਚੇ ਕੋ ਹੋ ਗਿਆ ਝੂਠ ਦੂਰ ਕਰਤਾ ਸੱਚ ਸਭ ਧਾਰਿਆ ਸਾਰੇ ਸੱਚ ਤਾਂ ਰਮਕਾ ਲਿਆ ਆ ਇੱਕ ਹੋ ਗਿਆ ਸੱਚ ਲੋਕ ਇੱਕ ਥਾਟ ਸਿਰਜ ਸੰਸਾਰ ਗੁਰੂ ਉਹਨੇ ਥਾਟ ਬਣਾਇਆ ਸੰਸਾਰ ਨੂੰ ਸਿਰਜ ਕੇ ਪਹਿਲਾ ਸੰਸਾਰ ਸਿਰਜਿਆ ਥਾਟ ਬਣਦਾ ਜਿੱਥੇ ਜਾਂਦਾ ਅਨੰਦ ਬਣਦਾ ਜਿੱਥੇ ਆ ਕੇ ਉੱਥੇ ਥਾਟ ਬਣਦਾ ਸਕਾਣਾ ਬਣ ਗਿਆ ਟਿਕ ਗਿਆ ਜਿੱਥੇ ਤੁਹਾਨੂੰ ਠੀਕ ਹੈ ਜੀ ਗੁਰਮਖੀ ਜੀ ਇੱਥੇ ਸ਼ਬਦ ਗੁਰੂ ਨੂੰ ਕਿਹਾ ਤੁਹਾਨੂੰ ਦੇ ਵੀ ਕੇ ਗੁਰੂ ਘਰ ਦੇ ਖਾਓ ਆਪਣੇ ਠਿਕਾਣੇ ਬਣਾ ਲੈ ਸਾਠ ਇੱਥੇ ਕਿਖ ਗਏ ਆਗੇ ਠਿਕਾਣੇ ਬਣ ਗਏ ਉਹਦੀ ਦੋਲਦੇ ਉਥੋਂ ਉਹਦੇ ਦੇ ਕੇ ਅੰdre ਬਣਿਆ ਪਰ ਇਸ ਅਸ ਅਸਲੀ ਜੇ ਬਕੇ ਆਗਿਆ ਹੋਏ ਬੇਦ ਪਾਪ ਕੋਲ ਬੇਦ ਦੀ ਆਗਿਆ ਤੇ ਨਾਲ ਜਿਹੜੀ ਆ ਦੀ ਵਿਚਾਰ ਕੀਤੀ ਆ ਬੇਦ ਵਿੱਚ ਉਹ ਪਦ ਪਾ ਬਚਾਰੇ ਕੀ ਹੁੰਦਾ ਆਗੇ ਉਹ ਲੋਕੋ ਬੇਦਾਤ ਆਗੇ ਬ੍ਰਹਮਾ ਵਿਸ਼ਣ ਬ੍ਰਹੇਸ਼ ਤ੍ਰੈਗ ਉਹਦੇ ਤਾਰੇ ਬ੍ਰਹਮਾ ਵਿਸ਼ਣ ਬ੍ਰਹੇਸ਼ ਤਨਾ ਬਣੂ ਦੇ ਵਿੱਚ ਇਹਨਾਂ ਦਾ ਬੇਤਾਰ ਕੀਤਾ ਹੈ ਸੁਲਝਾਰ ਸਾਰੇ ਜੀਵ ਤਨਾ ਬਣੂ ਚਦੇ ਕਿਦਾਂ ਬਣਦਾ ਇਹ ਸਾਰੇ ਹਾਂ ਜੀ ਪਹਿਲੇ ਸਮਝਾਓ ਆਗਿਆ ਹੋਈ ਬੇਰ ਪਾਪ ਪਾਪ ਉਹਨੂੰ ਕਿਹਾ ਨਾ ਪਾਪ ਉਹਨੂੰ ਬਿਚਾਰੇ ਬੁੱਢੋ ਜੀ ਦਾ ਕਾਹਦਾ ਕਿਹਾ ਜਾਂ ਉਹਨੂੰ ਕਿਹਾ ਜਾਂ ਇਸੇ ਦੀ ਵਿਚਾਰ ਹਰ ਆਗਿਆ ਹੋਏ ਬੇਦ ਤੋਂ ਹੀ ਭਾਵ ਪਰ ਅੱਛਾ ਕਰਿਆ ਹੋਇਆ ਹਰ ਆਗਿਆ ਹੋਏ ਬੇਦ ਦਾ ਭਾਵ ਦੱਸੋ ਹੋਰ ਜਿਹੜਾ ਬੇਦ ਹੈ ਗੁਰਬਾਨੀ ਆਗਿਆ ਹੀ ਹੈ ਆਪਾਂ ਕਹਿੰਦੇ ਹੁਕਮ ਲੈ ਲੀਏ ਆਪਾਂ ਆਗਿਆ ਹੀ ਹੁੰਦੀ ਹੈ ਵਿਵਾਨੀ ਜਾਨੂੰ ਆਗਿਆ ਕਰਦੀ ਹੈ ਜੇ ਅਸੀਂ ਫੜਦੇ ਹਾਂਦੀ ਆਗਿਆ ਹੈ ਫਿਰ ਹਰ ਬੋਲਦਾ ਇਹਦੇ ਵਿੱਚ ਸਾਡੇ ਹਰ ਵੀ ਬੋਲੀ ਬਣ ਬੋਲੀ ਹੋਈ ਹੈ ਹਾਂਦੀ ਆਗਿਆ ਹੀ ਜੋ ਹਰ ਬੋਲੇ ਉਹ ਹੀ ਹੈ ਜੋ ਗੁਰਖਾ ਪਾਣਾ ਉਹ ਵੇਦ ਹੈ ਠੀਕ ਹੈ ਬ੍ਰਹਮਾ ਵਿਸ਼ਨ ਮਹੇਸ਼ ਇਹ ਕੌਣ ਤਿੰਨ ਦੇਵਤੇ ਅਲੱਗ ਹੈ ਕਿ ਦੇ ਵਿੱਚ ਇਹ ਤਿੰਨ ਹੈਗੇ ਨਾ ਇਹ ਤਾਂ ਤੇਨ ਸੁਭਾਅ ਦੇ ਜੀਵ ਨੇ ਅੱਛਾ ਇਹ ਤਿੰਨ ਸੁਭਾਅ ਆਇ ਤੇ ਗੋਲੀ ਮਾਇਆ ਮਾਇਆ ਦੇ ਚਤਨ ਸੁਭਾਅ ਦੇ ਜੀਵ ਜੀਵਾਂ ਨੂੰ ਪੈਨਾ ਕਰਦੇ ਤੇ ਜੀਵ ਜੀਵਾਂ ਨੂੰ ਪਾਣਾ ਕਰਦੇ ਤੇ ਜੀਵ ਜੀਵਾਂ ਦਾ ਸਮਰ ਕਰਦੇ ਤੇ ਇੱਥੇ ਕੋਈ Hindu ਦੇਵਤਿਆਂ ਦੀ ਗਲਤੀ ਨਹੀਂ ਹੋ ਰਹੀ ਨਾ ਤੁਸੀ ਸ਼ਾਇਦ ਬ੍ਰਹਮਾ ਵਿਸ਼ਨੂੰ ਮਹੇਸ਼ ਤਿੰਨ Hindu ਦੇਵਤੇ ਬਣਾਏ ਤੁਸੀਂ ਕਿਦੋਂ ਦੇਵਤਾ ਕਹਿੰਦੇ ਲੱਭੇ ਹੀ ਨਹੀਂ ਕਰੇ ਦੇਖੇ ਤਾਂ ਹੈ ਕਿਸਾ ਦੇ ਹੋ ਜਿਵੇਂ ਸ਼ਿਵਜੀ ਦਾ ਸਾਰਿਆਂ ਦਾ ਸੰਘਾਰ ਕਰਦਾ ਫਿਰ ਉਹ ਮੁਸਲਮਾਨਾਂ ਦਾ ਸੰਘਾਰ ਵੀ ਸ਼ਿਵਜੀਉਂ ਕਰਦਾ ਆਪਣਾ ਵੀ ਕਰਦਾ ਸਭ ਦਾ ਕਰਦਾ ਨਾਮ ਕੰਡ ਪੇਛਮੀ ਸਾਜ ਹਰ ਰੰਗ ਸਵਾਰ ਦੁਆ ਖਣਾ ਦੇ ਵਿੱਚ ਇਹ ਦੇ ਨਾਲ ਫਿਰ ਤੁਹਾਰੀ ਹੈ ਪਹਿਲਾ ਸਾਜੀ ਹੈ ਪਹਿਲਾ ਸਾਜੀ ਹੈ ਤਸਵੀਰ ਤੇ ਉਹ ਦੀ ਤੁਹਾਰੀ ਹੈ ਮੰਦ ਗਿਆ ਉਹਨੂੰ ਸਮਾਰ ਲਈ ਜਿਹੜਾ ਲੋਗ ਦੇ ਲੈਣੇ ਆਇਆ ਉਹਦੀ ਰਹਿ ਗਈ ਸਕੂਤ ਵੇਕੀ ਜੰਤੂ ਪਾਏ ਅੰਤਰ ਕਲਤਾ ਰਿਆ ਵੇਕੀ ਜੰਤੂ ਪਾਏ ਪੰਪ ਪੰਪ ਦੇ ਜੰਤੂ ਦੇ ਵੇਕੀ ਹਮੇ ਪੰਪ ਪੰਪ ਦੇ ਅਨੇਕ ਪ੍ਰਕਾਰ ਦੇ ਜੰਤੂ ਪਾਏ ਨੇ ਪਰ ਸਾਰਿਆਂ ਦੇ ਵਿੱਚ ਕਲ ਰੱਖੀ ਹੈ ਸਾਰਿਆਂ ਦੇ ਵਿੱਚ ਸ਼ਕਤੀ ਰੱਖੀ ਹੈ ਵੀ ਨਾ ਰਹੀ ਸ਼ਕਤੀ ਵੀ ਨਾ ਰਹੀ ਲੈਣ ਵਾਲੀ ਤੇ ਰਾਤ ਕੰਝਾਂ ਨੂੰ ਪਾਏ ਤੇ ਰਾਤ ਕੋਈ ਨਹੀਂ ਜਾਂਦਾ ਤੇ ਅੰਤ ਨੂੰ ਜਾ ਰਹੇ ਕੋਏ ਸਤ ਸਿਰਜਣ ਹਾਰੇ ਹੇ ਸੱਚੇ ਸਰਦਨ ਆਲਿਆ ਤੇਰਾ ਅੰਤ ਕੋਈ ਨਹੀਂ ਜਣਦਾ ਸੱਚੇ ਸਰਦਨ ਆਲਿਆ ਤੂੰ ਜਾਣ ਲੈ ਸਭ ਬਿਦ ਆਪ ਗੁਰੂ ਖਿਦ ਤਾਰੇ ਸਾਰੀਆਂ ਬਿਦੀਆਂ ਆਪੇ ਜਾਣਦੇ ਗੁਰਮੁਖਾਂ ਦੇ ਇਸ ਗੰਦਾ ਦੇਲ ਨੂੰ ਕਰਦੇ ਦਸਤਸਤ ਇਹ ਪਿਲੇਖਾ ਗੁਰਮੁਖਾਂ ਨੇ ਖੜ ਦਤਾ ਅਭੀ ਸਾਰੀਆਂ ਬਿਦੀਆਂ ਤੂੰ ਜਾਣਦਾ ਹਾਂਜੀ ਠੀਕ ਦੀ ਬਿਧੀ ਵੀ ਜਾਣਦਾ ਬਜ਼ਾਉਣ ਵਾਲੀਆਂ ਵੀ ਜਾਣਦਾ ਬਜ਼ਾਉਣ ਵਾਲੀਆਂ ਤੋਂ ਥੱਲੇ ਦੀਆਂ ਬਿਦੀਆਂ ਉਹ ਵੀ ਜਾਣਦਾ ਪਰ ਦੋ ਫਸਕੂ ਤਨਾਈ ਜਰਾਈ ਇਹ ਸਭ ਤੂੰ ਕਿਨੂੰ ਕਹਿ ਤੂੰ ਜਾਣੇ ਸਭ ਵੀ ਦੀ ਆਪ ਇਹ ਤੂੰ ਕੌਣ ਹੈ ਜੀ ਤੂੰ ਆਪਣਾ ਸਾਥ ਹੋਰ ਆਪਣਾ ਮੂਲ ਹੈਂ ਹਾਂ ਠੀਕ ਹੈ ਪਰ ਗੁਰਮੁਖ ਨੂੰ ਇੱਕ ਇਹ ਸੋਝੀ ਪਈ ਹੈ ਨਹੀਂ ਕਿਸੇ ਹੋਰ ਨੂੰ ਨਹੀਂ ਪਈ ਇਹ ਛੋਟਣ ਲਈ ਵੀ ਦੀਆਂ ਹਜ਼ਾਰਾਂ ਵਾਲੀਆਂ ਵੀ ਤਾਂ ਜਾਣ ਪਈ ਨੇ ਤਾਂ ਉਹ ਗੱਲ ਸਵਾਲ ਦਾ ਪਹਿਲੇ ਛੱਡ ਲੈ ਸਾਰੇ ਇਹ ਗੱਲ ਤਾਂ ਇਹ ਵੀ ਗੱਲ ਤਾਂ ਹਜ਼ਾਰਾਂ ਸਵਾਲ ਕੱਢੇ ਗਲਤ ਹੋਏ ਤਾਂ ਠੀਕ ਤਾਂ ਬੁਝਾਈ ਤੱਕੜੇ ਤਾਂ ਅਰੇ ਗੁਰਦੁਆਰਾ ਸਾਹਿਬ ਆ। ਦੂਜਾ ਸਾਲ ਚੱਲ ਰਿਹਾ। ਸਵਾਲ ਮਾਰੀਏ ਜੀ। ਠੀਕ ਹੈ ਜੀ। ਇੱਥੇ ਪਹਿਲੀ ਪੌੜੀ ਦੀ ਸਮਾਪਤੀ ਹੈ ਜੀ।